ग्रहण सूरज के दिन कुर खेतरे आमन कथनह सोइया जो रब के रस बेखू को दिवस लग्यो कह ज्योत की ज्योत सुनायो कान की बात बिमातर प्रातः चले कुर खेतरे एठारायो ता चले बृजनाथ को लै संग भांतन भांत को सैन बनायो जो को अंत चहे ते को तिन को कछ आवत अंत ना पायो इथ ते बृज नायक आवत चंद्रभाग ब्रजपाल सुता सब ग्वालन श्याम जबै दर्शाए रूप निहार रही चक चककै जकगी कछ बैन कहो नहीं जाए नंद जसो मत प्रेम बढ़ाय कै कान झुके उर में लपटाए नंद जसो मत प्रेम बढाए कै ननन ते दो नीर बहायो ऐसे कहो ब्रज को तुम त्याग गए मथुरा जी ऐसे ही भायो कापयो जो तुम मार चंदूर प्रहार के संग कंस कायो ਹੋ ਨਿਰਮੋਹ ਨਿਹਾਰ ਦਾ ਅਮਰੀ ਤੁਮਰੇ ਮਨ ਮੋਹ ਨਾ ਆਇਓ ਸੋਈਆ ਪ੍ਰੀਤ ਵਢਾਇ ਜਸੋ ਮਤਿ ਜੋ ਉਮਰਿਤ ਭੂਖਨ ਸੋ ਜਿਕ ਬੈਨ ਉਚਾਰੋ ਪਾਲ ਕੀਏ ਜਪੂਤ ਬੜੇ ਤੁਮ ਤੋ ਕਹਿ ਲਗਾਓ ਹੋ ਕਿਉ ਹਰ ਹੈ ਸਭ ਹੀ ਫੁਨ ਦੋਸ਼ ਮਾਰੋ ਊਖਲ ਸੋ ਤੋ ਬਾਂਧ ਕੈ ਮਾਰਿਓ ਹੈ ਜਾਣਤ ਹੋ ਸੋ ਬੈਰ ਚਿਤਾਰੋ ਮਾਏ ਹੋ ਬਾਤ ਕਹੋ ਤੂੰ ਸੋ ਸੋ ਤੋ ਮੋਹਬਤੀਆ ਸੁਣ ਸਾਚ ਪਤੀਜੈ ਔਰਨ ਕੀ ਸਿੱਖ ਲੈ ਤਬ ਜੋ ਤੈਸੋ ਕਾਜ ਕਰੋ ਜਿਨ ਜੋ ਸੁਣ ਲੀਜੈ ਨੈਕ ਵਿਛੋਪ ਹੈ ਤੁਮਰੇ ਮਰੀਐ ਤੁਮਰੇ ਪਰ ਹੀਰਤ ਜੀਜੈ ਬਾਲ ਬਲਾਹਿ ਲਿਓ ਬੋਰ ਬ੍ਰਿਧ ਕੋ ਬ੍ਰਿਧ ਭੁਖਨ ਭੁਖਿਤ ਜੀਜੈ ਧੋਰਾ ਆਨੰਦ ਜਸੋਦਾ ਕ੍ਰਿਸ਼ਨ ਮਿਲ ਅਤਿ ਚਿਤ ਮੈ ਅਸੁਖ ਪਾਏ ਸਵੇ ਗੋਪ ਕਾ ਜਿਹ ਉਤੀਤਾ ਪਹੁੰਚੇ ਜਾਏ ਸੋਇਆ श्री ब्रजनाथ है को जब ही लख कह तहे ग्वारन आगम पायो ਚਲੀ ही एक चली उठ कै नह एकन के ओर आन जमायो भेख मलीन जे ग्वार होती तिन भेख नवीन सजे कब गायो मानो अमृतक जाग उठयो तिन के तन में बहरो जी आयो ग्वारन बाज स्वैया यो एक भागत है मुकते मिल ग्वारन ਜੋ ਅਕਰੂਰ ਕੇ ਸੰਗ ਗਏ ਚੜ ਸਿੰਧਨ ਨਾਥ ਉਲਾਸ ਵਢੈ ਕੈ ਦੂਰ ਹੁਲਾਸ ਕੀਓ ਬ੍ਰਿਜ ਤੇ ਕਛ ਗੁਵਾਰਨ ਕੀ ਕਰਨਾ ਨਹਿ ਕਹਿ ਕੈ ਇਹ ਕਹੈ ਇਹ ਭਵਨ ਸਖੀ ਮੁਖ ਜੋਤਿ ਏਕ ਰਹੀ ਚੁਪ ਹੋਐ ਕੈ ਸੋਈ ਆਂ ਫਰੀ ਬ੍ਰਿਜ ਨਾਥ ਕਛ ਚਿਤ ਬਿਖੈ ਸਕੀ ਏਤਨ ਧਾਰਿਓ ਨਾਇਕ ਨਾਮੋ ਹੋਕਿਓ ਚਿਤ ਮੈ ਨਿਰਮੋਹੀ ਆਪਨ ਚਿਤ ਵਿਚਾਰਿਓ ਯੋ ਬ੍ਰਿਜਨਾਥ ਗੌਰਤਜੀ ਜਸ ਕਾ ਸਭ ਕੋ ਕਵ ਸਾਮ ਉਚਾਰਿਓ ਆਪਣੀ ਚਉਪਹਿ ਤੇ ਯਪਨੀ ਮਾਨੋ ਕੁੰਜੈ ਧਿਆਗ ਪੁਜੰਗ ਸਿਧਾਰਿਓ ਚੰਦਰ ਪਗਾ ਪ੍ਰਿਗ ਪਾਣ ਸੁਤਾ ਬ੍ਰਿਜਨਾਥ ਕਹੋ ਸੁਨਾਈ ਸ੍ਰੀ ਬ੍ਰਿਜਨਾਥ ਕਹਿ ਮਥੁਰਾ ਤਜ ਕਹਿ ਬ੍ਰਿਜਪ੍ਰੀ ਸਵੇ ਬਿਸਰਾਈ ਰਾਧ ਕਾ ਜਾਬਦ ਮਾਨ ਕੀਓ ਹੀ ਮਾਨ ਜੀ ਆਈ सुतान के बिछरे बिछरे सो हम को अब दिखाई सवैया एक मेरी कह जौ बतिया जो होती ब्रज भूखन को अति प्यारी चंद्र भगा बिरग जो धरे तन बीच क सारी केर कथा दे छोर रही चक चित्रा की पुत्री सी सवारी श्याम पनय ब्रज नाथव सब गुआरन ज्ञान ही मै कर डारी ਬਿਸਨ ਪਾ ਤਨ ਸੁਨ ਪਾਈ ਬ੍ਰਿਜ ਬਾਲਾ ਮੋਹਨ ਆਏ ਹੈ ਕੁਰਖੇਤ ਦਰਸ਼ਨ ਦੇਖ ਸਵੈ ਦੁਬਿਸਰੇ ਬੇਦ ਕਾਜੇ ਨੇਤ ਤਨ ਮਨ ਅਟਕਿਓ ਚਰਨ ਕਬਲ ਸੋ ਧਨ ਵਿਛਾਵਰ ਦੇਤ ਕ੍ਰਿਸ਼ਨ ਇਕਾਉਤ ਕਿਓ ਤੇਹੀ ਛਿਨ ਕਹੋ ਗਿਆਨ ਸਿਖਲੇ ਹੋ ਮਿਲ ਵਿਛਰਨ ਦਉ ਇਹ ਜਗ ਮੈਂ ਮਿਥਿਆ ਤਨ ਅਸਨੇਹ ਸਵੈਯਾ ਬ੍ਰਿਜ ਨਾਇਕ ਠਾਣ ਪੈ ਸਭ ਗਵਾਰਨ ਕਹੋ ਐਸੇ ਗਿਆਨ ਦ੍ਰਿੜਾਏ ਨੰਦ ਜਸੋਵਤ ਪੰਡਕੋ ਪੁੱਤਰ ਸੰਗ ਮਿਲੇ ਅਤਿ ਹੇਤ ਵਢਾਏ ਕੈਰ ਵਿਆਹ ਹੋ ਤੋ ਜਿਤਨੇ ਸਭ ਆਪਣੇ ਆਪਣੇ ਧਾਮ ਸਿਧਾਏ ਸਿਆਮ ਪਨੈ ਬਾਰੋਪ੍ਰਿਦ ਨਾਇਕ ਦਵਾਰ ਵਤੀ ਹੂ ਕੇ ਭੀਤਰ ਆਏ ਦੋਹਰਾ ਜਗਤਹਾ ਕਰ ਕਹਿ ਚਲਿਓ ਸਿਆਮ ਪਨੈ ਬਸਦੇਵ ਜੇ ਕੋ ਸੁਤ ਚੌਦਾ ਭਵਨ ਸਭ ਦੇਵਨ ਕੋ ਦੇਵ ਚੌਪਈ ਚਲਿਓ ਸਿਆਮ ਜੋ ਪ੍ਰੇਮ ਬੜਾਈ ਪੂਜੋ ਚਰੁ ਪਿਤਾ ਕੇ ਜਾਈ ਤਾ ਜਬੈ ਲਖ ਆਵਦ ਪਾਏ ਤ੍ਰਿ ਕੇ ਕਰਤਾ ਠਹਰਾਏ ਬੋਵ ਵਿਹਾਰ ਕੀ ਉਸਤਤ ਕਰੀ ਮੂਰਤ ਹਾਰ ਕੀ ਚਿਤ ਮੈਂ ਧਰੀ ਆਪਨੋ ਪ੍ਰਭ ਲਖ ਪੂਜਾ ਕੀਨੀ ਸ੍ਰੀ ਜਦ ਜਾਨ ਸਭ ਨੀਨੀ ਇਤ ਸ੍ਰੀ ਦਸ਼ਮ ਸਕੰਦ ਪੁਰਾਣੇ ਬਚਿਤ੍ਰਨਾਟ ਗ੍ਰੰਥੇ ਕ੍ਰਿਸ਼ਨ ਆਵਤਾਰੇ ਵਿਖੈ ਜਗ ਕਰਕੇ ਗਵਾਰਨ ਕੋ ਗਿਆਨ ਦ੍ਰਿੜਾਏ ਦਵਾਰ ਬਤੀ ਜਾਤ ਪੈ ਧਿਆਏ ਦੇਵਕੀ ਕੇ ਛਾਠ ਹੀ ਪੁੱਤਰ ਲਿਆਏ ਦੇਨ ਕਥਨੰਗ ਸੋਈਆ ਸ੍ਰੀ ਬ੍ਰਿਜ ਨਾਇਕ ਪੈ ਤਬਹੀ ਕਬ ਸ਼ਾਮ ਕਹ ਚਰ ਦੇਵਕੀ ਆਈ 14 ਲੋਕਨ ਕੇ ਕਰਤਾ ਤੁਮ ਸਤ ਇਹ ਮਨ ਮੈਂ ਠਹرائی ਹੋ ਮਦ ਕੀਤਵ ਕੇ ਕਰਤਾ ਬਧ ਐਸੇ ਕਰੀ ਹਰ ਵਡਾਏ ਪੁੱਤਰ ਜਿਤੇ ਹਮਰੇ ਹਨੇ ਕੰਸ ਸੋ ਹਮ ਕਹ ਤੁਮ ਦੇਹੋ ਮੰਗਾਈ आण दिए बाल लोक ते बालक माए के बहन जबे सुन पाए देवकी बालक जान तिन कब श्याम कहे ओठ कंठ लगाए जनमन की सुध पी तिन को हम ब्राह्मण है ए बहन सुनाए मात पिता हु को देखती तेउ ब्रह्म के तीर्थ कर्ण पार्थ तब गायो द्वारवती जदपत दर्शायो और सुभद्रा रूप निहारयो चित को शोक दूर कर डारयो चौपाई याकूब रो ए चित आयो ओ को उते चित ललचायो जद पति बात सबह जानी प्रयो ਕਬਾਰ ਅਰਜਨ ਸੋਈ ਫਨ ਕਰਿਓ ਪੂਜਨ ਜਾ ਸੁਪਦਰਾ ਹਰਿਓ ਜਾਦੂ ਸਭੈ ਕੋਪ ਤਵ ਭਰੇ ਸ੍ਰੀ ਜਦਪਤੀ ਪੈ ਆਏ ਪੁਕਰੇ ਸਵਈਆ ਸ੍ਰੀ ਬ੍ਰਿਜਨਾਥ ਤਵੇ 300 ਕਬ 시ਆਮ ਕਹੇ ਇਹ ਪਉ ਬੜੇ ਤੁਮਹੁ ਕੋ ਕਹਾਵਤ ਜਾਏ ਮਨੋ ਤੇ ਸੰਗ ਲੜਾਈ 파ਰਥ ਤੋਰਨ ਮਾਡਣ ਕਾਜ ਚਲੇ ਤੁਮਰੀ ਅਮ੍ਰਿਤ ਹੀ ਨਜਕਾਈ क्यों ना चलो तुम मैं तब तैत जियौ आहव श्याम यह ठहरी चौपाई तब जोधा जत पति के धाये पार्थ कहो ए सुनाए सुन रे अर्जुन तो ते डर है महापत तेरो बद कर है दोरा ਫੰਡ ਪੁੱਤਰ ਜਾਨੀ ਹੈ ਮਾਰਤ ਜਾਦ ਮੋਰ ਜੀ ਆਤਰ ਹੋਏ ਸ਼ਾਮ ਕਹਿ ਚਲਿਓ ਦਵਾਰ ਕਾ ਔਰ ਸੋਈਆ ਸੂਕ ਗਇਓ ਮੁਖ 파ਰਧ ਕੋ ਮੁਸਲੀ ਤਰਦੀ ਜਬੈ ਗ੍ਰਹ ਆਇਓ ਸ੍ਰੀ ਬ੍ਰਿਜਨਾਸ ਸੰਬੋਧ ਕਿਯੋ ਅਰੇ 파ਰਥ ਕਿਉ ਚਿਤ ਮੈਂ ਢਰ ਪਾਇਓ ਵ્યાਸ ਭਦਰਾ ਕੋ ਕੀਨ ਤਵੈ ਜਬ ਹੀ ਮੁਸਲੀ ਤਰ ਕਉ ਸਮਝਾਇਓ ਦਾਜ ਦਇਓ ਜੇ 파ਰ ਨਾ ਲੈ ਤੇ ਅਰਜਨ ਤਾਮ ਸਿਧਾਇਓ ਇਤ ਸ੍ਰੀ ਵਿਜੇ ਤਰਨਾਟ ਗ੍ਰੰਥੇ ਕ੍ਰਿਸ਼ਨ ਅਵਤਾਰੇ 파ਰਥ ਭਦਰ ਕੋ ਹਰ ਕੈ ਵਿਆਹ ਕਰਿ ਆਪਤ ਭੈ ਅਥ ਮਿਥਿਲਾਪੁਰ ਰਾਜੇ ਅਰ ਬ੍ਰਹਮਣ ਕਾ ਪ੍ਰਸੰਗ ਹਰ पसमाग देद ਕੋ ਛਲ ਕੇ ਮਾਰ ਬ੍ਰੁੱਧਰ ਕੋ ਛਡਾਵਤ ਭੈ ਦੋਹਰਾ ਮਿਥਿਲ ਦੇਸ ਕੋ ਪੂਪੇ ਇੱਕ ਨਾਮ ਜਦ ਪਤ ਕੀ ਪੂਜਾ ਕਰੈ ਮਤ ਕੇ ਦਿਜ ਇਕ ਥੋਤ ਹਾਂ ਮੇਰ ਹਰਿ ਨਾਮ ਨਾ ਲੇ ਜੋ ਹਰ ਕੀ ਬਾਤ ਐ ਕਰੈ ਤਾਹੀ ਮੈਂ ਚਿਤ ਦੇਵ ਸੋਈਆ ਹੂਪਤ ਜਾਇਦ ਜੋ ਤੁਮ ਕੇ ਗ੍ਰਹਿ ਹੈ ਰੈ ਸ੍ਰੀ ਬ੍ਰਿਜਨਾਥ ਵਿਚਾਰੈ ਔਰ ਕਛੂ ਨਾ ਬਾਤ ਕਰੈ ਕਬਿ ਸ਼ਾਮ ਕਹਿ ਦੋ ਸਾਂਝ ਸਵਾਰੈ ਬਿਪਰ ਕਹ ਕਨ ਸ਼ਾਮੀ ਆਇ ਹੈ ਸ਼ਾਮੀ ਆਇ ਹੈ ਭੂਪੂਚਾਰੈ ਸ੍ਰੀ ਬ੍ਰਿਜਨਾਇਕ ਕੀ ਚਰਚਾ ਸੰਗ ਸਾਥ ਘਰੀ ਪੁਨ ਜਾਮ ਨਾ ਟਾਰੈ ਕੂਦ ਜੋਤਮ ਕੀ ਆਤੀ ਹਰ ਜੂ ਮਨ ਮੈਂ ਜਬ ਪ੍ਰੀਤ ਵਿਚਾਰੀ ਮੇਰੇ ਹੈ ਧਿਆਨ ਕੇ ਬੀਜ ਪਰੇ ਇਹ ਔਰ ਕਥਾ ਅਗਰਹਿ ਕੀ ਜੋ ਵਿਸਾਰੀ ਦਾਰਗ ਕਉ ਕਹ ਸੰਤਨ ਪੈ ਜੋ ਕਰੀ ਪ੍ਰਭ ਜੀ ਤਿਹ ਔਰ ਸواری ਸਾਧਨ ਜਾਇ ਸਨਾਥ ਕਰੋ ਅਬ ਸ੍ਰੀ ਬ੍ਰਿਜਨਾਥ ਐ ਜੀ ਧਾਰੀ ਚੌਪਈ ਜਦ ਪਦ ਦੋਇ ਰੂਪ ਨਾ ਆਇਓ ਇਕ ਦਿਜਕੇ ਇਕ ਨਿਰਪਕੇ ਆਇਓ ਦਿਜ ਨਿਰਪਿਆਤ ਸੇਵਾ ਤੇ ਕਰੀ ਜਿਤ ਸਭ ਚਿੰਤਾ ਪਰ ਹਰੀ ਲੋਹਰਾ ਚਾਰ ਮਾਸ ਹਰ ਜੂ ਤਹ ਰਹੇ ਬਹੁਤ ਸੁਖ ਪਾਏ ਬਹੁਰੇ ਆਪਣੇ ਗ੍ਰਹਿ ਗਏ ਜਸ ਕੀ ਮੰਬ ਬਜਾਏ ਇਕ ਕਹਿਗੇ ਜਿਜ ਭੂਵਕ ਬ੍ਰਿਜ ਪਦ ਕਹ ਸਨੇਹ ਬੇਚਾਰ ਜਿਉ ਮੋਹਿ ਜਪੈ ਤਿਉ ਮੋਹਿ ਜਪ ਸੁਨ ਲੇ ਹੋ ਇਤ ਸ੍ਰੀ ਦਸ਼ਮ ਸਕੰਦ ਪੁਰਾਣੇ ਵਿਚਤਰਨਾਟਕ ਗ੍ਰੰਥੇ ਕ੍ਰਿਸ਼ਨ ਆਵਤਾਰੇ ਮਿਥਿਲਾਪੁਰ ਰਾਜੇ ਅਰ ਬ੍ਰਾਹਮਣ ਕਾ ਪ੍ਰਸੰਗ ਸਮਾਪਤ